ਸਤ ਸੰਗਿਓ ਮਨੁਭੀਤੀ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਭ ਮਾਈ ਪਾਈ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸਤ ਸੰਗਿਓ ਆਪ ਸੱਜਣਾ ਨੇ ਅਮਰਦੇਵ ਦੇ ਦੁਸ਼ਣਾਨ ਕਰਕੇ ਭਜਨ ਕੀਤਾ ਹੈ ਆ ਸਾਜੀ ਦੀ ਵਾਰ ਦਾ ਕੀਕਰ ਸ਼ਰਮਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕੀਤੇ ਹਨ ਸੰਸਾਰ ਦੇ ਉੱਤੇ ਲੱਖਾਂ ਤੇ ਹਜ਼ਾਰਾਂ ਕਰੋੜਾਂ ਇਨਸਾਨ ਹਨ ਸਾਰਿਆਂ ਨੂੰ ਤੁਸੀਂ ਵੇਖੋ ਸਾਰਿਆਂ ਦੀ ਸ਼ਕਲ ਨਹੀਂ ਆਪੋ ਜਿਹੀ ਰਹੀ ਤੇ ਹਜ਼ਾਰਾਂ ਵਿੱਚੋਂ ਕਈ ਵਾਰੀ ਝੌਲਾ ਪੈ ਜਾਂਦਾ ਹੈ ਲੋਬੀਆ ਦੇ ਬਿਲਕੁਲ ਉਹਦੇ ਵਰਗਾ ਹੈ ਕੁਝ ਉਹਦੇ ਨਕਸ਼ ਨੇ ਜਿਹੜੇ ਉਹਦੇ ਨਾਲ ਰਲ ਇਸੇ ਤਰ੍ਹਾਂ ਇਨਸਾਨ ਦੀ ਬੁੱਧੀ ਵੀ ਜਿਹੜੀ ਹੈ ਨਾ ਉਹ ਵੀ ਵੱਖੋ ਵੱਖਰੀ ਖੋਪਰੀ ਖੋਪਰੀ ਕੀ ਮਤ ਨਹੀਂ ਹਰ ਇੱਕ ਇਨਸਾਨ ਅਕਸਰ ਵੱਖੋ ਵੱਖਰੀ ਬੁੱਧੀ ਹੈ ਇਹ ਵੀ ਲਿਖਿਆ ਸਾਧ ਸਮੂਹ ਅਨੇਕ ਮਤੀ ਸਾਧ भी ਬੜੇ ने, ਅੱਜ ਕੱਲ ਤੇ ਹੜ ਆਇਆ ਆ ਸਾਦਾ ਪਰ ਹੈ ਨੇ ਇਸੇ ਤਰ੍ਹਾਂ ਦੇ ਕਿਤੇ ਵਿਰਲੇ ਹੁੰਦੇ ਨੇ ਪਾਉ ਆ ਸੜਕਾਂ ਦੇ ਉੱਤੇ ਪਾ ਪਾ ਕੇ ਨਾ ਪੱਥਰ ਤੇ ਕੁੱਟ ਕੁੱਟ ਕੇ ਤੇ ਉੱਤੇ ਸਮਝੋ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਪਾ ਕੇ ਤੇ ਸੜਕ ਬਣਾ ਦਿੰਦੇ ਨੇ ਕਾ ਬੜੇ ਨੇ ਇੱਥੇ ਗੁੱਗੀਆਂ ਬਟੇਰੇ ਮੋਰ ਹੋਰ ਬੜੀਆਂ ਚੀਜ਼ਾਂ ਹਨ ਪਰ ਕਦੇ ਹੰਸ ਵੀ ਦੇਖਿਆ ਜੀ ਉਹ ਕਿਤੇ ਮੈਨੂੰ ਤੇ ਮੈਂ ਤੇ ਨਹੀਂ ਦੇਖਿਆ ਵੇਖਿਆ ਮੈਂ ਕਹਿ ਨਹੀਂ ਸਕਦਾ ਇਸੇ ਤਰ੍ਹਾਂ ਹੀ ਸੰਸਾਰ ਦੇ ਉਤੇ ਦਰਖਤ ਬੜੇ ਹੁੰਦੇ ਨੇ ਵੱਡ ਵੱਡ ਕੇ ਲੱਗਣਾ ਬਾਲ ਦੇ ਨੇ ਆ ਚ ਡਾ ਦੇ ਨੇ ਕੋਠਿਆਂ ਤੇ ਚੀਰ ਚੀਰ ਕੇ ਪਾ ਦੇ ਨੇ ਪਰ ਸੰਜੀ ਕਿਤੇ ਕਲਪ੍ਰਿਕ ਨਹੀਂ ਵੇਖਿਆ ਜੀ ਉਹ ਜਿਹੜਾ ਉਹ ਨਹੀਂ ਕਿਤੇ ਹੁੰਦਾ ਵੇਖਿਆ ਹੋਏ ਤੇ ਪਤੀ ਗਾ ਪਤਾ ਨਹੀਂ ਤੁਹਾਨੂੰ ਪਤਾ ਹੋਵੇ ਵੇਖਿਆ ਕਿ ਨਹੀਂ ਵੱਖ ਵੇਖਿਆ ਇਸੇ ਤਰ੍ਹਾਂ ਦੇ ਬੰਦੇ ਬੜੇ ਨੇ ਮੋਟਰਾਂ ਥੱਲੇ ਆ ਕੇ ਮਰ ਜਾਂਦੇ ਨੇ ਕੁਝ ਤੇ ਬੜੀ ਉਸੇ ਤਰ੍ਹਾਂ ਦੀ ਗੱਲ ਸੀ ਤੇ ਹੁਣ ਸਤਗੁਰ ਸੱਚੇ ਪਾਲ ਅਕਾਲ ਪੁਰਖ ਜੀ ਨੂੰ ਆਨੇ ਉਹ ਆਪ ਹੱਤਵਾਦੀ ਬਣ ਗਏ ਮਾਰ ਉਧਰੋਂ ਹੜ ਲਿਆ ਦਿੱਤੇ ਨੇ ਉਹਦੇ ਕੋਦਰ ਆ ਗਿਆ ਤੇ ਕੁਝ ਆ ਗਿਆ ਤੇ ਮਾ ਪਤਾ ਹੀ ਨਹੀਂ ਦੁਜਿਆਂ ਨਾਲੋਂ ਕਿਤੇ ਗਾਂ ਜਾ ਉਸਨੇ ਨੁਕਤਾ ਲਾਇਆ ਮਰਦੇ ਬੰਦੇ ਨਹੀਂ ਬੜੇ ਲੇਕਿਨ ਸੰਤ ਕਿਤੇ ਕਿਤੇ ਹੁੰਦੇ ਨੇ ਨੀਰੀ ਸਿੱਧੀ ਪੱਗ ਬੰਨ ਲੈਣ ਨਾਲ ਲੱਜਰ ਕਰਨ ਨਾਲ ਕਥਾ ਕਰਨ ਨਾਲ ਕੀਰਤਨ ਕਰਨ ਨਾਲ ਕਛਾ ਪਾਣ ਨਾਲ ਮਾਲਾ ਫਾੜ ਕੇ ਹੱਥ ਵਿੱਚ ਫੜ ਕੇ ਇਸੇ ਤਰ੍ਹਾਂ ਨਹੀਂ ਪਾਉ ਸੰਤ ਬਣੇਗਾ ਸੰਤ ਦੇ ਲੱਛਣ ਹੀ ਹੋਰ ਹੁੰਦੇ ਹਨ ਸਾਧੂ ਦੇ ਲੱਛਣ ਹੀ ਹੋਰ ਹੁੰਦੇ ਹਨ ਸੋ ਕਈ ਮਤੀ ਦੇ ਹੁੰਦੇ ਹਨ ਕੋਈ ਕਿਸ ਤਰ੍ਹਾਂ ਦਾ ਹੁੰਦਾ ਹੈ ਕੋਈ ਕਿਸ ਤਰ੍ਹਾਂ ਦਾ ਹੁੰਦਾ ਹੈ ਕਹਿੰਦੇ ਨੇ ਸਾਧ ਸਮੂਹ ਅਨੇਕ ਮਤੀ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਵੱਖਰੀ ਮਾਤਮ ਦੀ कोई ਜਲ ਤਾਰਾ ਕਰਦਾ ਸਰਦੀਆਂ ਦੇ ਦਿਨਾਂ ਵਿੱਚ ਪਾਣੀ ਹੱਥੀਂ पाया ਜਾਂਦਾ ਹੋਏ ਇਹਦੇ ਜੀ ਬੜੀ ਸਿੱਧੀ ਸਮਝਦਾ ਉਹਦਾ ਤੇ ਸੰਜੀਤ ਸਰੀਰ ਇਸ ਤਰ੍ਹਾਂ ਹੁੰਦਾ ਉਹਨੂੰ ਤੁਹਾੜੇ ਨਾਲ हो ਤੇ ਤਾਂ ਵੀ ਨਹੀਂ ਪਤਾ ਲੱਗਦਾ ਉਹ ਸੁੰਨ ਹੋ ਜਾਂਦਾ ਹੁੰਦਾ ਉਹਦਾ ਇਸੇ ਤਰ੍ਹਾਂ ਸਰੀਰ ਕਈ ਆਸਰੇ ਜਿਹੜੇ ਪੁੱਠੇ ਰਟਕੇ ਤਪੱਸਿਆ ਕਰਦੇ ਕਈ ਆਸਰ ਜੀ ਕੋ ਕਾਲੇ ਕੇ ਸਤਗੁਰਾਂ ਦੇ ਗ੍ਰੰਥ ਚੋਂ ਕਾਹੀ ਸੀ ਸੱਚੇ ਪਾਤਸ਼ਾਹ ਗੁਰੂ ਰਾਮ ਜੀ ਤੁਰੇ ਜਾਂਦੇ ਹਨ ਦੇਖ ਤੁਰਿਆ ਜਾਂਦਾ ਹੀ ਤੇ ਉਹਨੂੰ 2-3 ਮੀਲ ਛੇੜ ਦੇ ਗਏ ਨੇ ਕਦੇ ਇੱਧਰ ਧਰ ਦੇ ਨੇ ਮੋਢਾ ਕਦੇ ਇੱਧਰ ਉਹਦੇ ਮੋਢੇ ਤੇ ਸਲੋਤਰ ਧਾ ਦੇ ਨੇ ਤੇ ਜਦੋਂ ਤੁਰ ਗਿਆ ਤੇ ਆਖਿਆ ਗੁਰੂ ਨਾ ਅਥੇ ਜਨਮਾਂ ਦਾ ਚੁੱਪ ਕਿਤਾਈ ਕਈ ਚੁੱਪ ਕਰਕੇ ਮਰ ਜਾਂਦੇ ਨੇ ਉਹਨਾਂ ਗੱਲ ਹੀ ਨਹੀਂ ਕਿਸੇ ਨੂੰ ਕਈ ਗੱਲ ਪੈਂਦੇ ਰਹਿੰਦੇ ਨੇ ਕਿਸੇ ਦੇ ਪਤਾ ਨਹੀਂ ਕਿਹੜੇ ਵੇਲੇ ਉਹ ਨੂੰ ਗੱਲ ਪੈ ਜਾਂਦਾ ਹੈ ਇਹ ਹਰ ਇੱਕ ਦੁਨੀਆ ਵਿੱਚ ਸੰਸਾਰ ਵਿੱਚ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਇਹ ਸਾਰੇ ਲੋਕ ਜਿਹੜੇ ਨੇ ਕੀ ਕਰਦੇ ਨੇ ਜਿਸ ਤਰ੍ਹਾਂ ਲਿਖਿਆ ਨਾ ਸਾਧਨ ਹੇਠ ਕੀਤੀ ਜਾਣਕਾਰੀ ਸਾਧਾ ਵਾਸਤੇ ਨਹੀਂ ਕੀਤੀ ਉਥੇ ਕੀਤੀ ਸਾਧਨ ਨੇ ਜਦੋਂ ਪਵੀ ਧਾਰਨ ਕਰਨਾ ਤਿਲਕ ਲਾਣਾ ਇਹ ਸਾਧਨ ਹਣੇ ਸਾਰੇ ਸਾਧ ਈਸ਼ਵਰ ਦੀ ਪ੍ਰਾਪਤੀ ਵਾਸਤੇ ਕਰਦੇ ਹਨ ਜਿਸ ਤਰ੍ਹਾਂ ਅਸੀਂ ਸੋਧ ਰੱਖਨੇ ਆ ਅਸੀਂ ਕਿਸ਼ਾਰੇ ਪਾਣੇ ਆ ਇਹ ਸਾਧਨ ਨੇ ਸਿਰਫ ਈਸ਼ਵਰ ਪ੍ਰਾਪਤੀ ਵਾਸਤੇ ਸਾਰੇ ਸਾਧਨਾ ਵਾਸਤੇ ਇਹ ਸਾਧਨ ਨੇ ਵੀ ਇਹਨਾਂ ਸਾਧਾ ਨਾਲ ਸਾਧਨ ਨਾਲ ਈਸ਼ਵਰ ਪ੍ਰਾਪਤੀ ਹੋ ਜਾਂਦੀ ਹੈ ਕੋਈ ਕੋਈ ਸਾਧਨ ਕਰਦਾ ਆ ਅਖੀਰ ਉਹਨਾਂ ਦਾ ਨੁਕਤਾ ਨਿਗਾ ਜਿਹੜਾ ਉਹ ਈਸ਼ਵਰ ਪ੍ਰਾਪਤੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹਗੇ ਸਿੱਖਾਂ ਨੇ ਅਰਜ਼ ਕੀਤੀ ਤੇ ਗਰੀਬ ਨੂੰ ਆਜ ਜਿਸ ਰਿਸ਼ਵਾਰ ਵਾਸਤੇ ਐਨੇ ਸਾਧਨ ਕੀਤੇ ਜਾਂਦੇ ਹਨ ਐਨੇ ਦੁੱਖ ਉਟਾਏ ਜਾਂਦੇ ਹਨ ਉਹਦੀ ਪ੍ਰਾਪਤੀ ਦਾ ਤਰੀਕਾ ਸਾਨੂੰ ਫਿਰ ਸਤਗੁਰੂ ਉਹਨਾਂ ਨੂੰ ਉਪਦੇਸ਼ ਦੇਦੇ ਕਹਿੰਦੇ ਨੇ ਕਹਾਂ ਪਿਓ ਜੋ ਦੋ ਲੋਚਨ ਬੈਠ ਰਿਹਾ ਉਹ ਲਗਾਇਓ ਨਾ ਹੱਥ ਫਿਰਿਓ ਹਲੀਏ ਸਮੁੰਦਰ ਲੋਗ ਦੇਓ ਪਰ ਲੋਗ ਦਵਾਇਓ ਬਾਸ ਕੀ ਉਹ ਵਿਖਿਆਨ ਸਬੈ ਸਕੇ ਐਸੇ ਹੀ ਐਸ ਸਬੈ ਸਬੈ ਸਬਾਇਆ ਸਾਚ ਕਹੂੰ ਸੁਣ ਲੇ ਹੋ ਸਬੈ ਜਿਨ ਪ੍ਰੇਮ ਕੀ ਉਹ ਤ ਨਹੀਂ ਪ੍ਰਭ ਪਾਇਓ